श्लोक मोहल्ला चौथा गुरुमुख मिले से सज्जना हरप्रभु पाया रंग जन नाम सलाह तू लुड्ढ लुड्ढ दरगह वंज जक गुरुमुख मिल जवे ओ सज्जन हुदा है गुरुमुख सज्जन ने सबदे सज्जन हुंदे ने हरप्रभु पाया रंग ता हरप्रभु दा रंग उत प्राप्त हो जांदा ਅਸੀਂ ਤਾਂ ਗੁਰਮੁਖ ਡੁੱਬਣ ਕੀ ਪਾਇਆ ਸਾਨੂੰ ਹੋਇਆ ਸਭ ਨੂੰ ਮਿਲ ਜਾਂਦਾ ਏ ਜੇ ਮਰਜੀਵੇ ਗੁਰਮਖਣਾ ਮੇਲ ਕਰ ਲਵੇ ਤਾਂ ਮਿਲ ਜਾਂਦਾ ਰੰਧੋ ਜੇ ਚਾਹੀਦਾ ਫੇਰ ਉਹ ਮੇਲ ਵੀ ਨਹੀਂ ਕਰਦਾ ਜਿਹਨੂੰ ਲੋੜ ਨਹੀਂ ਹੈ ਜਦ ਨਾਨਕ ਨਾਮ ਸਲਾਹੇ ਤੁਂ ਜਦ ਨਾਨਕ ਕਹਿੰਦਾ ਨਾਮ ਨੂੰ ਸਲਾਹ ਲੈ ਤੁਂ ਉਹਦੀ ਸਫਲਾਹ ਜਿਹੜੀ ਹੈ ਹੁਕਮ ਦੀ ਸਫਲਾਹ ਹੱਲ ਹੈ ਲੋਟ ਲੋਟ ਦਰਗਾ ਵੰਜ ਵਾਫੇਆਂ ਨਰਸਾ ਹੁਣ ਮਾਰਦਾ ਜਾਂ ਸਰਦਾਰਾਂ ਦੇ ਖੇਤਰ ਨੂੰ ਡਰਦੀ ਲੋਲਟੀ ਉੱਥੇ ਉਹ ਬਹੁਤ ਡਰਦੇ ਨੇ ਲੋਕ ਡਰਦੇ ਕਿਉਂ ਨੇ ਡਰਦੇ ਨੇ ਹੁਕਮ ਤੋਂ ਡਰਦੇ ਨੇ ਜਿਹੜਾ ਇੱਥੇ ਆ ਗਿਆ ਉਹ ਕਹਿੰਦਾ ਨੇ ਬਾਣੀ ਦਾ ਉਹ ਜੰਮਣ ਵਾਲਾ ਹੁਕਮ ਹੈ ਜੇ ਹੁਕਮ ਨਾਲ ਇੱਥੇ ਬਣ ਗਈ ਤੇ ਬਾਦ ਵਿੱਚ ਉਹ ਰਹਿ ਗਿਆ ਡਰਦੇ ਨੇ ਬਸ ਬੇਟਾ ਖੁਸ਼ੀ ਰਾਜਾ ਹਾਂਜੀ ਮਹੱਲਾ ਚੌਥਾ ਹਰ ਤੂੰ ਹੈ ਦਾਤਾ ਸਭ ਦਾ ਸਭ ਜੀਤ ਤੁਹਾਰੇ ਸਭ ਤੁੱਦੈ ਨੂੰ ਆਰਾਧ ਦੇ ਦਾਨ ਦੇਹੀ ਤੂੰ ਹੈ ਦਾ ਹੈ ਹਰ ਤੂੰ ਸਾਰਿਆਂ ਦਾ ਹੀ ਦਾਤਾ ਸਭ ਦੇ ਅੰਦਰ ਹੈ ਤੂੰ ਸਭ ਜੀਤ ਤੁਹਾਰੇ ਜੇ ਤੂੰ ਸਭ ਦੇ ਅੰਦਰ ਹੈ ਜਦ ਜੀਤ ਇਤੋਂ ਪੈਦਾ ਹੋਏ ਤੇਰੀ ਜੀਤ ਸਭ ਤੁੱਦੈ ਨੂੰ ਆਰਾਧ ਸਾਡੇ ਰਾਜ ਨੂੰ ਵੀ ਤੇਰੀਓ ਕਰਦੇ ਨੇ ਦਾਨ ਦੇ ਹੀ ਪਿਆਰੇ ਤੇ ਪਿਆਰੇ ਤੋਂ ਦੱਸਦੇ ਤੇ ਤੋਂ ਹੀ ਮੰਗਦੇ ਨੇ ਅਸਲ ਚ ਜੇ ਦਰਗਾਹ ਤੇ ਕੁਝ ਮਿਲਣਾ ਸਿੱਧਾ ਨਹੀਂ ਮਿਲਦਾ ਤੇ ਜੰਤਰੋਂ ਨਹੀਂ ਸਿੱਧਾ ਮਿਲਦਾ ਜੀ ਜੰਤਰੋਂ ਨਹੀਂ ਮਿਲਦਾ ਸਿੱਧਾ ਤੇਰੇ ਥਰੂਏ ਮਿਲਦਾ ਅੱਛਾ ਮਤਲਬ ਆਮ ਵੈਸੇ ਦਾਤਾ ਦਾ ਪਰਮੇਸ਼ਰ ਹੈ ਪਰਮੇਸ਼ਰ ਹਰ ਦੇ ਥਰੂ ਵਰਤਦਾ ਹੈ ਹਾਂ ਹਰ ਦੇ ਥਰੂਏ ਵਰਦਾ ਜੋ ਮਿਲਦਾ ਇਹ ਰੂਹ ਮਿਲਦਾ ਕੁਝ ਵੀ ਇਹਦਾ ਭਰੋਸਾ ਕਰਦਾ ਇਹਦਾ ਹਰ ਨਾਲ ਠੱਗੀ ਮਾਰ ਜਾਂਦਾ ਉਹਦੇ ਲਈ ਬੰਦਦਾ ਗੱਲ ਪਰਮੇਸ਼ਰ ਵੱਡਾ ਦਾਤਾ ਉਹ ਹੈ ਤੇ ਦਾਨ ਦੇ ਕੇ ਦੇਣ ਵਾਲਾਗਾ ਤੇ ਜਿਹੜਾ ਬਾਪ ਦੀ ਜਿਹੜਾ ਬਾਪ ਨੇ ਠੱਗੀ ਮਾਰ ਲਵੇ ਦੁਆ ਦਾ ਸੋਧਾ ਭਰੋਸਾ ਕੌਣ ਕਰੂ ਠੀਕ ਹੈ ਫਿਰ ਇਹੀ ਕਹਾਂਗੇ ਪਰਮੇਸ਼ਰ ਵੱਡਾ ਦਾਤਾ ਇਹ ਪਰਮੇਸ਼ਰ ਤੋਂ ਦਾਨ ਲੈ ਕੇ ਅੱਗੇ ਦਿੰਦਾ ਫਿਰ ਹੈ ਹਾਂ ਆ ਵਸ ਵਸ ਦਾ ਦਾਤਾ ਅਸਰ ਜੋ ਹੀ ਹੈ ਇਹਦੇ ਥਰੂ ਮਿਲਦਾ ਹਾਂਜੀ ਹਰ ਦਾਤਾ ਹੱਥ ਕੱਢਿਆ ਮੀਂਹ ਸੰਸਾਰੇ ਅੰਨ ਜਮਿਆ ਖੇਤੀ ਭੋਕਰ ਹਰ ਨਾਮ ਸਮਾਰੇ ਦੇਖੋ ਹਰ ਦਾਤਾ ਹਰ ਦਾਤੇ ਨੇ ਹਰ ਦਾਤਾਰ ਹਨ ਹਰ ਦਾਤੇ ਦਾਤਾਰ ਨੇ ਹੱਥ ਕੌਰ ਕੱਢਿਆ ਕੀ ਕੱਢਿਆ ਹੁਕਮ ਕੱਢਿਆ ਹੁਕਮ ਪ੍ਰਗਟ ਕਰਦਾ ਸੰਸਾਰ ਤੇ ਹੱਥ ਕੱਢਿਆ ਦਾ ਮਤਲਬ ਹੈ ਪਾਟ ਕੱਢ ਕੇ ਆਪਾਂ ਦੁਨਿਆਨ ਕਿਸੇ ਨੂੰ ਕੋਈ ਚੀਜ਼ ਸੰਸਾਰ ਨੂੰ ਜਾਂ ਤੇ ਹੱਥ ਬਾਹ ਹੁਕਮ ਨੂੰ ਪ੍ਰਗਟ ਕਰਦਾ ਇਹ ਹੋ ਗਈ ਸੰਸਾਰ ਤੇ ਪਾਣੀ ਰਚੀ ਗਈ ਹੈ ਤੁਹਾਨੂੰ ਸਾਰੇ ਰਚੀ ਹੈ ਵੀਹੇ ਮੁੱਠਾ ਇਹੀ ਮੁੱਠਾ ਹੋਰਦੀ ਹੈ ਕੁਰਬਾਨੀ ਵੀ ਇਹ ਵਰਦਾ ਜੇ ਤੇ ਵਿਚਾਰ ਕੇ ਵੀ ਤ੍ਰਿਸ਼ਨਾ ਕਰਦੂ ਦੇਈ ਜਾ ਰਹੀ ਸਰਸਾਰ ਦੀ ਤਾਂ ਇਹਦਾ ਮਤਲਬ ਇਹ ਹੈ ਕਿ ਅਸੀਂ ਇਹਨੂੰ ਸਮਝਾ ਨਹੀਂ ਹੈ ਸਮਝਾ ਨਹੀਂ ਹੈ ਦਾ ਅਰਥਾਤ ਇਹ ਨਰਸ ਕਰਦੇ ਹੋ ਰਹੀ ਉਹ ਜਗ੍ਹਾ ਅਰਥਕਰਮ ਦੇ ਦੀ ਜਗਾ ਤੇਜਾਬੀ ਪਾਣੀ ਛਿੜਕਦਾ ਪੰਜਾਬ ਦੇ ਵੀ ਤਾਂ بارش ਹੋ ਜਾਂਦੀ ਹੈ ਉਹ ਪੰਜਾਬ ਦੀ بارش ਕਰਨ ਲਈ ਉਹਨੇ ਸਮਝਾ ਸੀ ਨਾ ਉਹਦਾ ਜਿਹੜੀ ਮਾਣੀ ਫੋਟੀ ਸੀ ਉਹ ਵੀ ਖਰਾਬ ਕਰਦੀ ਉਸ ਦਾ ਦੇ ਸਿਕਿਉਰਿਟੀ ਰਹੀ ਪੰਜਾਬੀ ਪਾਣੀ ਦਾ ਕਰਨ ਤੇਰੀ ਹੜ ਦੇ ਤੁਸੀਂ ਉੱਥੇ ਰਹੂਗੀ ਜਿਵੇਂ ਉਸਾਰੇ ਅੰਦ ਜਮਿਆ ਖੇਤੀ ਪਾਉ ਕਰ ਖੇਤੀ ਖੇਤਾਂ ਵਿਚ ਆ ਜਮੇ ਪਾਦਾ ਦੀ ਫਸਲ ਜੀ ਪਾਉ ਕਰ ਪ੍ਰੇਮ ਕਰਕੇ ਜਮੇ ਹਰਨਾਮ ਸਮਾਹ ਹਰਨਾਮ ਦੇ ਖਜਾਨੇ ਭਰ ਗਏ ਬੋਹੜ ਲੱਗੇ ਹਰਨਾਮ ਦੇ ਹਰਨਾਮ ਇਹ ਨਾਮ ਜਦ ਵੀ ਸਾਰੇ ਹਰ ਰਿਦੇਸੇ ਨਾਮ ਪ੍ਰਗਟ ਹੋ ਗਿਆ ਨਾਮ ਦੇ ਭੁੱਖ ਸੀ ਬਹੁਤ ਲੋਕਾਂ ਨੂੰ ਉਹ ਵੀ ਬਾਰਿਸ਼ ਠੀਕ ਨਹੀਂ ਹੋਈ ਤੁਹਾਨੂੰ ਜੋ ਉਪਦੇਸ਼ ਠੀਕ ਨਹੀਂ ਮਿਲੇ ਅਰਥ ਠੀਕ ਨਹੀਂ ਮਿਲੇ ਕੋਈ ਠੀਕ ਨਹੀਂ ਮਿਲੀ ਉਹ ਸਾਰਾ ਪ੍ਰਗਟ ਹੋ ਗਿਆ ਬੀਜ ਤਾਂ ਪਹਿ ਹੀ ਸੀ ਧਰਤੀ ਤੇ ਧਰਤੀ ਜੀ ਅਸੀਂ ਤਾਂ ਵੀ ਪਿਆ ਤੇ ਬਜਮਾਇਆ ਸਾਰਿਆਂ ਦੇ ਪਹਿਲਾਂ ਬੀਜ ਰੂਪ ਪਹਿਲਾਂ ਹੀ ਸੀ ਸਾਰਿਆਂ ਦੇ ਇਹਨਾਂ ਦੇ ਬੀਜ ਸੀ ਜਮਾਇਆ ਇਹਨਾਂ ਦੇ ਹੈ ਨਹੀਂ ਸੀ ਉਹਨਾਂ ਦੇ ਨਹੀਂ ਕਿਤੇ ਮਾਣਕ ਜਮਾ ਜੇਤੇ ਵੀ ਪਿਆ ਸੀ ਜਮਿਆ ਹਾਂਜੀ ਜਨ ਨਾਨਕ ਮੰਗੇ ਦਾਨ ਪ੍ਰਭ ਹਰ ਨਾਮੁ ਪਾਰੇ ਨਾਨਕ ਸੁਣਦਾ ਦਾਨ ਪ੍ਰਭ ਨਾਲ ਕਹਿੰਦਾ ਜਿਹਾ ਧਿਆਨ ਕੋ ਦਾਨ ਚ ਧੁੰਦੇ ਦਾ ਪ੍ਰਭ ਤੇ ਬੁਕਰਾ ਹਰ ਨਾਮੁ ਆਧਾਰ ਕੀ ਮੰਗਦਾ ਹਰ ਲੋਕ ਦਾ ਆਧਾਰ ਮੁਕਦਾ ਉਹਦੀ ਕੁਝ ਹੁੰਦਾ ਇਹੀ ਮੰਗਦਾ ਨਾਮदाई ਦਾਨ ਬੁਕਰਾ ਨਾਮ ਹੀ ਸਾਡੇ ਇਛਾਨ ਹੈ। ਨਾਮ ਪਦਾ ਨਹੀਂ ਇਛਾਨ ਜਿਹੜਾ ਹੈ ਨਾਮ ਹੀ ਸਾਡੇ ਇਹ ਹੀ ਆਧਾਰ ਹੈ ਸਾਡਾ। ਨਾਮ ਹੀ ਗੁਰਮੁਖ ਖਾਨ ਨੇ ਗੋਸੇ ਖੋਦਦੇ ਨੇ ਉਹ ਬਾਕੀ ਦਾ ਸਰੀਰ ਖਤਰ ਹੈ, ਆਪੇ ਹੀ ਸਰੀਰ ਹੋਰ ਨੇ ਦਿੱਤਾ ਉਹ ਜ਼ਿਆਦਾ ਫਿਕਰ ਸਾਡੇ ਨੂੰ। ਹਾਂ ਜਿਹੜਾ ਹਰ ਦਾਤ ਦਾਤਾਰ ਹੱਥ ਕੱਢਿਆ ਇਹ ਮੈਨੂੰ ਲੱਗਦਾ ਜਿਹੜੀ ਭਗਤ ਰਵਿਦਾਸ ਜੀ ਦੀ ਕਹਾਣੀ ਨਹੀਂ ਬਣਾਈ ਕਿ ਉਹਨਾਂ ਨੇ ਪੈਸਾ ਦਿੱਤਾ ਸੀ ਵੀ ਗੰਗਾ ਗੰਗਾ ਵਾਲਾ ਗੰਗਾ ਵਾਲੀ ਕਾੜੀ ਬਣਾਈਏ ਹਾਂਜੀ ਉਹ ਇੱਥੋਂ ਹੀ ਲੱਗਦਾ ਕਿ ਉਹਨਾਂ ਨੂੰ ਇਹ ਨਹੀਂ ਪਤਾ ਇਹ ਨਿਰਾਕਾਰੀ ਹੱਥ ਹੈ ਜੀ ਸਭ ਪਤਾ ਉਹਨਾਂ ਨੂੰ ਜਾਣ ਕੇ ਬਣੀਆਂ ਨੇ ਉਹਨੇ ਕਹ ਲਿਆ ਬੇਰੀ ਲਾਤੀ ਤੁਸੀਂ ਜੋਰ ਲਾ ਲੋ ਨਹੀਂ ਬੰਦੇ ਅਗਲੇ ਹਾਂਜੀ ਦਰਬਾਰ ਸਾਹਿਬ ਉਹਨਾਂ ਜੇ ਤਾਂ ਦੁੱਖ ਭਾਂਜਣੀ ਬੇਰੀ ਦੀ ਇੰਪੋਰਟੈਂਸ ਬਣਾਈ ਹੋਈ ਹੈ ਬੰਦੇ ਨਹੀਂ ਐ ਦੇ ਵਿੱਚ ਜਿਹੜਾ ਨਾਮ ਜਿਹੜਾ ਬਾਰ-ਬਾਰ ਵੀ ਨਾਮ ਟੇਕ ਰੱਖੋ ਆ ਨਾਮ ਸਾਰਾ ਮਸਲੇ ਦਾ ਹੱਲ ਹੈ ਇਹ ਨਾਮ ਨਾਲ ਜਿਹੜਾ ਦੁੱਖ ਦੂਰ ਹੋ ਜਾਣਗੇ ਦੁੱਖ ਭਜਨ ਦਾਮ ਹੈ ਤੇਰਾ ਇਹੋ ਨਹੀਂ ਮੰਦੇ ਮੇਰੀ ਤੇ ਵਿਸ਼ਵਾਸ ਹੈ ਤੇ ਵਿਸ਼ਵਾਸ ਹੈ ਜੀ ਆ ਫਿਰ ਉਹ ਪਤਾ ਲੱਗਦਾ ਹਿੰਦੂ ਹੀ ਹੈ ਨਹੀਂ ਹਿੰਦੂ ਵੀ ਨੇ ਚੰਗੇ ਭਲੇ ਹਿੰਦੂ ਤਾਂ ਉਹ ਵੀ ਹਿੰਦੂ거든 ਜਿਹਨਾਂ ਨੇ ਵਿਸ਼ਵਾਸ ਕਰ ਲਿਆ ਹਾਰੇ ਹਿੰਦੂ ਇਹ ਦਾਸ ਮਤੀ ਦਾਸ ਵਰਗੇ ਉਹ ਵੀ ਬ੍ਰਾਹਮਣੇ ਸੀ ਉਹਨਾਂ ਨੇ ਤਾਂ ਬ੍ਰਾਹਮਣ ਸੀ ਆਪਾਂ ਤਾਂ ਹਿੰਦੂਾਨਾ ਤੁਰਕੂ ਗਾਣੇ ਵਾਲੇ ਆ ਜੀ ਅਨੇ ਵਾਲੇ ਆਪਾਂ ਉਹ ਲੈ ਨੂ ਬੰਦੇ ਅੱਡੇ ਮਨੁਨਾਣੇ ਕਾਲੇਵਟਾਨੇ ਤਾਂ ਮਰਜ਼ੀ ਹੈ ਜੀ ਨੂੰ ਅੱਖਾਂ ਨਹੀਂ ਚਾਹੀਦੀਆਂ ਜਦਵੀ ਬਸਦਾਬੇ ਜੇ ਪੱਥਰ ਬਣਿਆ ਰਹੇ ਤਾਂ ਫਿਰ ਪੱਥਰ ਇਹ ਕਲਰ ਵਾਲੀ ਧਰਤੀ ਬਣੀ ਰਹੇ ਰਹੇ ਕਿਸੇ ਦਾ ਕੀ ਨੁਸਾਨ ਇੱਛਾ ਮਨ ਕੀ ਪੂਰੀ ਹੈ ਜਪੀਏ ਸੁਖ ਸਾਗਰ ਹਰ ਕੇ ਚਰਨ ਅਰਾਧਿਆ ਗੁਰ ਸ਼ਬਦੀ ਰਤਨਾਗਰ ਇੱਛਾ ਮਨ ਕੀ ਪੂਰੀ ਹੈ ਜੇ ਬੰਦੀਆਂ ਅਛਾ ਪੂਰੀਆਂ ਕਲਦੀਆਂ ਕਿ ਜਨਾ ਜਪੀਆ ਸੁਖਸਾਗਰ ਸੁਖਸਾਗਰ ਨੂੰ ਜਪ ਲਓ ਸੁਖਸਾਗਰ ਨਾਮ ਹੈ ਸੁਖ ਜਪ ਲਓ ਕੋਕੂ ਜਾ ਜੋ ਸੁਖਸਾਗਰ ਹੈ ਜਿਹੜਾ ਪਾਣੇ ਜਾ ਗਿਆ ਗਿਆ ਹਰ ਚਰਨ ਰਾਧੀ ਹੈ ਗੁਰ ਰਤਨਾਗਰ ਜਿਹੜੇ ਹਰ ਕੇ ਚਰਨਾਂ ਗੁਰਬਾਣੀ ਹਰ ਕੇ ਨੇ ਇਕਲੀਆਂ ਇਕਲੀਆਂ ਪੰਕਤੀ ਚੱਲਣੇ ਨੇ ਕਹਣਾ ਰਾਧੀ ਹੈ ਆ ਜਿਹੜੇ ਗੁਰ ਨੇ ਸਾਰੇ ਚੜ ਰਹੇ ਨੇ ਇਹਨਾਂ ਦੇ ਰਾਜ ਨਾ ਕਰੋ ਗੋਣਾ ਦੀ ਗੋਣ ਹੋ ਜਾਣ ਪੈਦਾ ਅੰਦਰ ਬਿਲਕੁਲ ਕੀਤੇ ਇਕੱਠੇ ਗੋਣ ਦੀ ਗੱਲ ਹੈ ਗੁਰ ਰਤਨਾਗਰ ਆ ਜਿਹੜਾ ਗੁਰ ਸ਼ਬਦ ਹੈ ਇਹ ਤਾਂ ਰਤਨਾ ਦੀ ਖਾਨ ਹੈ ਉਪਦੇਸ਼ ਜਿਹੜਾ ਹੈ ਗੁਰ ਹੈ ਰਤਨਾਗਰ ਰਤਨਾ ਦਾ ਖਜ਼ਾਨਾ ਹੈ ਹਾਂਜੀ मिल साधु संगी उधार होए पटै जम कागर जन्म पदार्थ जिती जप हर बैरागर मिल साधु संगी साधु दी संगत ਵਿੱਚ ਮਿਲ ਕੇ ਉਦਾਰ ਹੋਏ ਉਦਾਰ ਹੋ ਜਾਂਦਾ ਹੈ ਫਟੇ ਜਮ ਕਾਗਰ ਜੰਮ ਦੇ ਕਾਗਜ਼ ਫਟ ਜਾਂਦੇ ਨੇ ਉਹ ਜਿਹੜੇ ਸੀ ਨਾ ਤੁਹ ਕਹਦੇ ਦੇ ਕਾਹ ਤੇ ਪੜੋ ਉਲਟੀ ਜਾਨ ਨੂੰ ਜਾਨਵਾ ਪਦਾਰਥ ਜਿੱਤੀ ਹੈ ਕਰਨ ਪਦਾਰਥ ਜਿੱਤਣਾ ਨਾ ਹੋ ਜਦ ਹਰ ਬੈਰਾਗਰ ਜਿਹੜਾ ਹਰ ਬੈਰਾਂ ਨਹੀਂ ਉਹ ਮਾਇਆ ਦਾ ਉਹਦੇ ਵਿੱਚ ਕੋਈ ਲੇਸ ਨਹੀਂ ਹੈ ਮਾਇਆ ਤੋਂ ਅਲਿਖ ਹੈ ਉਹ ਬੈਰਾਗਰ ਅਲਿਖ ਹੈ ਮਾਇਆ ਤੋਂ ਭਰ ਨੂੰ ਜਪ ਲਿਆ ਜਾਣ ਲਿਆ ਬੈਰਾਗਰ ਹਰ ਨੂੰ ਜਨ ਪਦਾਰਥ ਜਿੱਤੇ ਆ ਗਿਆ ਇੱਕ ਹੋ ਗਿਆ ਹੋ ਗਿਆ ਹਾਂਜੀ ਜਨਮ ਪਦਾਰਥ ਜੀਤੀ ਹੈ ਜਪ ਹਰ ਬੈਰਾਗਰ ਇਹ ਬਿਹਾਰੀ ਨਾਲ ਲਿਖਦੇ ਆ ਜੀ ਜੀਤੀ ਹੈ ਹਾਂ ਜਿੱਤ ਲਈਦਾ ਅੱਛਾ ਇੱਥੇ ਜਨਮ ਪਦਾਰਥ ਦੀ ਦੁਬਾਰਾ ਗੱਲ ਆ ਰਹੀ ਹੈ ਹੁਣ ਪਹਿਲਾਂ ਵੀ ਜਨਮ ਪਦਾਰਥ ਜੀਤੀ ਆਇਆ ਸੀਗਾ ਇਸੇ ਵਾਰ ਚ ਫੇਰ ਆਇਆ ਜੀ ਆਖਰੀ ਵਾਰ ਹੈ ਥੋੜੀ ਵੀ ਚੌਦਵੀਂ ਚਲਦੀ ਹੈ ਠੀਕ ਹੈ ਜਨਮ ਪਦਾਰਥ ਉਹ ਪਦਾਰਥ ਹੈ ਜਿਹੜਾ ਕਿ ਜੀਵ ਨੇ ਇੱਥੋਂ ਪ੍ਰਾਪਤ ਕਰਨਾ ਹੈ ਜੀ ਹਾਂ ਜੀ ਹਾਂ ਠੀਕ ਹੈ ਇਹਦੇ ਬਾਰੇ ਕੋਈ ਬਹੁਤਾ ਕਿਸੇ ਟੀਕੇ ਚਾਰ ਪਦਾਰਥ ਸਾਡੇ ਆਖਰੀ ਜਨਮ ਪਦਾਰਥ ਹੈ ਜਿਹੜੇ ਚਾਰ ਪਦਾਰਥ ਟੀਕਿਆਂ ਦੇ ਧਰਮ ਅਰਥ ਕਾਮ ਮੋਖ ਕਹਿੰਦੇ ਉਹ ਹੈ ਜੀ ਉਹ ਫੇਉਣਾ ਦੇ ਹੁਣੇ ਨੇ ਕਾਸ਼ੀ ਮਾਤੜਾ ਸਾਡੇ ਕਿੱਥੇ ਹੈ ਜੀ ਪਦਾਰਥ ਉੱਤੇ ਕਿੱਥੇ ਹੈ ਏ ਗੁਰਮੁਖਾਂ ਦੇ ਜਿਹੜੇ ਹੈ ਇਹ ਹੈਗੇ ਜੀ ਪਹਿਲਾਂ ਗਿਆਨ ਪਦਾਰਥ ਗੁਰਬਾਣੀ ਦਾ ਗਿਆਨ ਪਦਾਰਥ ਨਾਲ ਭੁਗਤ ਪਦਾਰਥ ਮੁਕਤ ਪਦਾਰਥ ਨਾ ਨਾ ਪਦਾਰਥ ਨਾ ਪਦਾਰਥ ਜਨ ਪਦਾਰਥ ਹਾਂਜੀ ਸਭ ਪਵੋ ਸ਼ਰਣ ਸਤ ਕੀ ਬਿਨ ਸਹਿ ਦੁੱਖ ਦਾਗਰਾਰੇ ਸ਼ਰਣ ਸਤ ਗੁਰੂ ਦੀ ਜਾਜੋ ਹੁਕਮ ਜਾਜੋ ਸਹਿ ਦੁੱਖ ਦਾਗਰ ਆਹੇ ਡਰ ਕਰਦਾ ਦੁੱਖ ਤੋਂ ਨਾ ਦੋ ਖੁਦਾ ਅਮਰੀਕਾ ਹੀ ਦਲਦੇ ਕਰਦਾ ਅੰਦਰ ਇਹ ਤਰੀਕਾ ਦਾ ਜਿਹੜਾ ਦੁੱਖ ਹੈ ਇਹ ਦਲਦੇ ਕਰਦਾ ਅੰਦਰ ਸਾੜਦਾ ਹੈ ਨਾਸ ਹੋ ਛੁਟਕਾਰਾ ਮਿਲ ਜਾਊਗਾ ਹੁਕਮ ਚ ਆ ਜੀ ਬਾਹਰ ਜਾ ਜੀ ਹੋ ਜੀ ਸਤਿਗੁਰੂ ਹੁਕਮ ਵਾਸਤੇ ਆਇਆ ਜੀ ਵਾਹ ਗੁਰੂ ਗੋਬਿੰਦ ਸਿੰਘ ਸਤਿਗੁਰੂ ਹੈ ਜਿਹੜਾ ਸਾਡਾ ਗੁਰੂ ਹੈ ਜਿਹੜਾ ਠੀਕ ਹੈ ਜੀ ਇੱਥੇ ਪੌੜੀ ਸਮਾਪਤੀ ਹੈ ਜੀ ਹੋਈ